ਸੇ महला ਮਹੱਲਾ ਪੰਜਵਾ RAM ਜਪੋ ਵਡਭਾਗਿਓ ਜਲਥਲ ਪੂਰਨ ਸੋਏ ਨਾਨਕ ਨਾਮ ਧਿਆਈਐ ਬਿਗ ਨਾ ਲੱਗੈ ਕੋਈ RAM ਜਪੋ ਵਡਭਾਗਿਓ ਜਲਥਲ ਪੂਰਨ ਸੋਏ ਉਹ ਦਸਰਤ ਦੇ ਬੁੱਢੇ RAM ਨੂੰ ਨਾ ਜਪੋ ਕੈਨ ਦਾ ਬਸਲ ਬਹਿ ਹੈ RAM ਜਪੋ ਵਡਭਾਗਿਓ RAM ਨੂੰ ਜਾਣੋ ਸਮਝੋ ਦੇ ਕੋ ਕੌਣ ਨੇ ਭਰਪੂਰਨ ਤੋਂ ਕੀ ਭਾਵ ਹੈ ਜਲ ਥਲ ਪੂਰਨ ਹੋਏ ਪੂਰਾ ਕਰਿਆ ਉਹ ਧੂਰੇ ਬਲੂ ਅੱਛਾ ਗੁਰਦੇਵ ਐ ਨਾ ਗਿਆਨ ਤਾਂ ਉਹ ਤੋਂ ਲੈ ਨਹੀਂ ਰਿਹਾ ਗਿਆਨ ਨਾਨਕ ਨਾਮ ਧਿਆਈ ਹੈ ਬਿਗਨ ਨਾ ਲੱਗਿਆ ਕੋਈ ਨਾਨਕ ਜੇ ਨਾਮ ਦੇ ਵਿੱਚ ਧਿਆਨ ਲਖੀਏ ਤਾਂ ਬਿਗਨ ਕੋਈ ਵੀ ਨਹੀਂ ਲੱਗਦਾ ਇਹ ਧਿਆਨ ਉਹ ਜੇ ਨਹੀਂ ਰੱਖਦਾ ਧਿਆਨ ਹੋਰ ਪਾਸੇ ਰੱਖ ਲੈਂਦਾ ਬਾਹਰ ਗੁਰੂ ਬਣਾ ਲੈਂਦਾ ਆ ਲੋਭ ਧਿਆਨ ਰੱਖ ਲੈਂਦਾ ਹੈ ابو ਧਿਆਨ ਰੱਖਣਾ ਹੈ ਆ ਕੋਈ ਆਪਣੀ ਹੋਰੇ ਕੱਢ ਲੈਂਦਾ ਹੈ ਚਤਲਣ ਜੀ ਖੇਡਣ ਲੱਗ ਜਾਂਦਾ ਮਹੱਲਾ ਪੰਜਵਾਂ ਨਾਨਕ ਆਂਦਿਨ ਬਿਲਪਤੇ ਯੋ ਸੁਣੈ ਜਿਹਨੂੰ ਨਾ ਵਿਸਰ ਜਾਂਦਾ ਉਹਨੂੰ ਕਰੋੜਾਂ ਵਗਣ ਲੱਗ ਜਾਂਦੇ ਨੇ ਰਸਤੇ 'ਚ ਵਗਰ ਪੈ ਜਾਂਦੇ ਨੇ ਕਰੋੜਾਂ ਔਗਣ ਲੱਜਪੜਦੇ ਦੇਵਦੂ ਜਿਸ ਕੋ ਬਿਲਪਰੇ ਲੋ ਕਿ ਨਾਨਕ ਅੰਦਰ ਬਿਲਪ ਤੇ ਜੋ ਸੁਣਨਾ ਕਰ ਕਾਉਂ ਕਾਣਾ ਦਿਨ ਰਾਤ ਬਿਲਪ ਕਰਦੇ ਰਹਿੰਦੇ ਨੇ ਜੋ ਸੁਣਨਾ ਕਰ ਖਾਣ ਨੂੰ ਕੁਝ ਹੁੰਦਾ ਨਹੀਂ ਵਿਚਾਰਿਆ ਜਿਹੜਾ ਘਰੇ ਸੁਣਨਾ ਉੱਤੇ ਖਾਣ ਪੇਣ ਨੂੰ ਕੁਝ ਹੈ ਹੀ ਨਹੀਂ ਨੇ ਬਿਲਪਣਾ ਨਹੀਂ ਉੱਤੇ ਉਹ ਕੀ ਘਰ ਦਾ ਮਤਲਬ ਹੈ ਵੀ ਅੰਦਰ ਕੋਈ ਗਿਆਨ ਨਹੀਂ ਹੈਗਾ ਉੱਧਰ ਗਿਆਨ ਹਿਰਦੇ 'ਚ ਹੈ ਨਹੀਂ ਜੇ ਜੋਗੀ ਉੱਤੇ ਜਾ ਕੇ ਸਮਾਧੀ ਲਾਉਂਦਾ ਵੀ ਇਹ ਬਿਲਪਦਾਈਆ ਵਿਚਾਰਾ ਹੈ ਰਹੀ ਕੋਈ ਗੱਲ ਸਾਬਦ ਵਿਚਾਰਤਾ ਹੈ ਦੀ ਉਹ ਘਰ ਤੇ ਵੀ ਸੁਰ ਜਾ ਹਨੇਰਾ ਐ ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰੇਆ ਇਛ ਪੁੰਨੀ ਮਨ ਆਸ ਗਏ ਵਿਸੂਰਿਆ ਸਿਮਰ ਸਿਮਰ ਦਾਤਾਰ ਉਜੋਰਥ ਪੂਰੇਆ ਦਾਤਾਰ ਨੂੰ ਸਿਮਰਨ ਕਰਦੇ ਕਰਦਿਆਂ ਕਰਦਿਆਂ ਕਰਦਿਆਂ ਮਨੋਰਥ ਪੂਰੇ ਹੋ ਗਏ ਸਾਰੇ ਮਨੋਰਥ ਪੂਰੇ ਹੋ ਗਏ ਠੀਕ ਹੈ ਇਛ ਪੁੰਨੀ ਮਨ ਆਸ ਗਏ ਵਿਸੂਰਿਆ ਇਹ ਚ ਪੁਰੇ ਮਨ ਆਸ ਗਾਇਬ ਸੂਰਿਆ ਇੱਛਾ ਸੀ ਜਿਹੜੀ ਆਸ ਜਿਹੜੀ ਸੀ ਰੱਖੀ ਹੋਈ ਇਛਕ ਵਿੱਚ ਵਚਨ ਐਚ ਤੇ ਕੋਈ ਇਛਾ ਸੀ ਉਹ ਕੀ ਸੀ ਲੋਕ ਦੀ ਜਿਹੜੀ ਆਸ ਸੀ ਪੂਰੀ ਹੋ ਗਈ ਗਾਇਬ ਸੂਰਿਆ ਸਾਰੇ ਫਿਕਰ ਦੂਰ ਹੋ ਗਏ ਫਿਕਰ ਐਸੇ ਤੇ ਤੇ ਮਿਲ ਜਵੇ ਨਾ ਮਿਲ ਗਿਆ ਚੀਤਾਵਾਂ ਦੁੱਖ ਗੀਆਂ ਅਗਲਾ ਜਨਮ ਨਹੀਂ ਆਉਣਾ ਹੁਣ ਇਵੇਂ ਨਾਂ ਚਾਚ ਕਹਨੇ ਜੀ ਉਤਰੇ ਸਗਲ ਠੀਕ ਹੈ ਜੀ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਾ ਕਾਲਦਾ. ਦਾ ਪਾਇਆ ਨਾਮ ਨਿਧਾਨ ਲੋਬਿ ਜੁੜ ਗਈ ਜਿਸ ਨੂੰ ਭਾਲਦਾ ਭਾਲਦਾ ਇਸੇ ਨੂੰ ਭਾਲਦਾ ਸੀ ਤਿਲ ਜੋਤ ਮਿਲੀ ਸੰਗ ਜੋਤ ਰਹਾ ਕਾਲ ਦਾ ਦਸ ਫਿਰ ਕੀ ਹੈ ਜੋਤ ਜੋਤ ਨਾਲ ਜਦ ਬਿਲ ਸ਼ਬਦ ਵਿਚਾਰ ਚੱਲਦਾ ਹੀ ਰਿਹਾ ਫਿਰ ਫਿਰ ਸ਼ਬਦ ਵਿਚਾਰ ਨਹੀਂ ਰੁਕਿਆ ਫਿਰ ਵਿਚਾਰ ਚਲਦੀ ਹੀ ਰਹੀ ਆਪੇ ਚੱਲ ਪਈ ਆਪੇ ਆਟੋਮੈਟਿਕੇ ਚੱਲ ਪਈ ਚਲਾਉਣ ਦੀ ਲੋੜ ਨਹੀਂ ਰਹੀ ਠੀਕ ਚਲਾਉਣ ਦੀ ਲੋੜ ਰਹਿੰਦੀ ਸੀ ਹੁਣ ਆਟੋਮੈਟਿਕੇ ਚੱਲ ਪਈ ਮਿਲੀ ਜੀ ਜਗ ਚੇਤਨ ਮਾਨਿਕ ਅੱਛਾ ਤੇ ਸਫਲ ਹੋ ਗਿਆ ਹਾਂ ਠੀਕ ਹੈ ਜੀ ਸੂਖ ਸਹਿਜ ਆਨੰਦ ਗੁੱਠੇ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸੁਖ ਸਹਿਜ ਆਦਤ ਸਹਿਜ ਸੁਖ ਕੋਈ ਨਾ ਕੋਈ ਸੁਖ ਸਹਿਜ ਸੁਖ ਹੈ ਉਹ ਸੁਖ ਜਾਗਰਤ ਅਵਸਥਾ ਵਾਲਾ ਸੁਖ ਸਾਧਾਰਨ ਸੁਖ ਜਾਗਰਤ ਵਾਲਾ ਅਵਸਥਾ ਵਾਲੇ ਸੁਖ ਲਈ ਹੈ ਜਾਗਰਤ ਅਵਸਥਾ ਵਾਲਾ ਸੁਖ ਪ੍ਰਾਪਤ ਹੋ ਗਿਆ ਸੱਚ ਖੜਨ ਵਾਲਾ ਸੁਖ ਪ੍ਰਾਪਤ ਹੋ ਗਿਆ ਸੱਚ ਖੜਨ ਵਿੱਚ ਜਿਹੜੇ ਜਾਗਦੇ ਨੇ ਅਨੰਦ ਪੈਦਾ ਹੋ ਗਿਆ ਪਰਮ ਅਨੰਦ ਦੀ ਅਵਸਥਾ ਚਲਾ ਗਿਆ ਸਹਿਜ ਸੁਖ ਸੁਖ ਆਰੰਭ ਉੱਥੇ ਤਿਤਕਾਰ ਜਿਹੜੇ ਘਰ ਦੇ ਵਿੱਚ ਉਹ ਉੱਠਦਾ ਨਾ ਸ਼ਬਦ ਗੁਰੂ ਪ੍ਰਗਟ ਹੁੰਦਾ ਉੱਥੇ ਸੁਖ ਸਹਿਜ ਅਨੰਦ ਹੋ ਜਾਂਦਾ ਆਵਣ ਜਾਣ ਰਹੇ ਜਨਮ ਨਾ ਤਾਂ ਮਰ ਉੱਥੇ ਆਵਣ ਜਾਣ ਬੁੱਕ ਜਾਂਦਾ ਜਨ ਜਾਨੂਏ ਨੂੰ ਉੱਥੇ ਜਨਮ ਪਦਾਰਥ ਮਿਲ ਗਿਆ ਹੈ ਜੀ ਮਰਨ ਦੀ ਉਹ ਦੂਰ ਹੋ ਗਈ ਇਸ ਤਰ੍ਹਾਂ ਗੱਲ ਹੈ ਜਾਲਮਾਂ ਮਾਰਨ ਦਾ ਮੁੱਕ ਜਾਣਾ ਹੀ ਸਗਲ ਬਸੂਰੇ ਉੱਤਰੇ ਨੇ ਉੱਤਰੇ ਸਗਲ ਬਸੂਰੇ ਜਨਮ ਮਾਰਨ ਖਤਮ ਹੋ ਗਿਆ ਠੀਕ ਹੈ ਜੀ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸਤਿ ਸਮਾਇਆ ਸਾਹਿਬ ਔਰ ਸੇਵਕ ਕੋਈ ਸੀ ਐਵੇਂ ਦੋ ਬੰਦੇ ਸੀ ਲੱਗਦੇ ਸੀ ਦੋ ਸੇਵਕ ਸਾਹਿਬ ਤਾਂ ਇੱਕੋ ਹੀ ਦੋ ਤਾਂ ਹੋਏ ਉਹ ਦੋ ਹੱਥ ਤੇ ਸਰੀਰ ਤਾਂ ਇੱਕੋ ਹੀ ਸੀ ਵਾਹਾਂ ਹੀ ਦੋ ਸੀਆਂ ਸਰੀਰ ਤਾਂ ਇੱਕੋ ਹੀ ਸੀ ਦੋ ਤੇ ਬਿਨਾ ਕੰਮ ਨਹੀਂ ਹੁੰਦਾ ਇੱਕ ਹੱਥ ਤੇ ਕੰਮ ਕਰੂ ਦੋ ਆਧਣ ਕੇ ਤਾਂ ਕਪੜਾ ਹੀ ਨਹੀਂ ਦੂ ਚੜਦਾ ਪਹਿਲਾਂ ਇੱਕ ਆਤਮਾ ਸਾਬ ਦੇਵਕ ਇੱਕ ਉੱਦਾਈ ਇੱਕ ਆ ਸਾਬਾ ਸੇ ਇੱਕ ਦ੍ਰਿਸ਼ਟੀ ਆਇਆ ਇੱਕ ਦਿਸਤਾ ਆਇਆ ਇੱਕੋ ਹੀ ਦਿਸਤਬਾਦ ਹੋ ਗਿਆ ਹੁਣ ਹੁਣ ਆਲ ਪੂਰੀ ਸਮਝ ਹੋ ਇੱਕੋ ਹੀ ਹੈ ਪਹਿਲਾਂ ਸੁਣਿਆ ਸੀ ਦੇਖਿਆ ਨਹੀਂ ਸੀ ਇੱਕ ਕਰਕੇ ਹੀ ਦੇਖਸਮਾਨ ਹੋਇਆ ਇੱਕ ਕਰਕੇ ਹੀ ਦੇਖ ਲਿਆ ਇੱਕ ਦੇਖ ਲਿਆ ਇੱਕ ਦੀ ਸਭ ਜਾਗੀ ਇੱਕ ਦੇਸ਼ਟ ਆਇਆ ਨਾਨਕ ਸੱਚ ਸੁਣਾਇਆ ਗੁਰ ਦੀ ਧੰਦ ਸੱਚ ਸੁਣਾਇਆ ਗਿਆਨ ਦੀ ਕਿਰਪਾ ਦੇ ਨਾਲ ਨਾਨਕ ਸੱਚ ਵਿੱਚ ਸੁਣਾ ਗਿਆ ਦੇਖੋ ਆ ਫੇਰ ਪਿਛਲੀ ਪੰਕਤੀ ਦੇ ਦਾ ਦਰਸ਼ਨ ਕਰਾਤਾ ਗੁਰ ਗੁਰਬਾਣੀ ਦੇ ਉਰਾ ਇੱਕ ਦੇ ਬੁਝਾਈ ਸੋਬਰਾ ਜੀਆਂ ਦਾ ਇੱਕ ਦਾਤਾ ਸੋਬੇ ਤੇ ਸੰਗਲ ਜਾਈ ਸੇਵਕ ਸਾਹਿਬ ਇੱਕਾ ਇੱਕ ਕਹਾਣੀ ਦਾ ਗ੍ਰੰਥ ਐਸਾ ਦਿਖਾਓ ਮੈਨੂੰ ਜਿਹੜਾ ਦਾ ਦਰਸ਼ਨ ਇਸ ਤਰੀਕੇ ਨਾਲ ਕਰਾਉਣਾ ਰਿਹਾ ਕੋਈ ਵੀ ਇਹ ਗੱਲ ਮੈਂ ਮੁਸਲਮਾਨ ਨੂੰ ਕਹੀ ਸੀ ਇੱਕ ਕੀ ਆ ਕੁਰਾਨ ਦਾ ਵਿਸ਼ਾ ਹੈ ਇੱਕ ਕੀ ਆ ਗੁਰਬਾਣੀ ਦਾ ਵਿਸ਼ਾ ਹੈ ਕੁਰਬਾਨੀ ਦਾ ਵਿਸ਼ਾ ਹੀ ਇਹ ਆ ਇੱਕ ਬਾਕੀ ਦਾ ਗੁਰੂ ਸਮਝਾ ਕੇ ਘੇਰ ਕੇ ਲਿਆ ਕੇ ਸਾਡੀ ਸੁਰਤੀ ਟਿਕਾ ਕੇ ਫਿਰ ਇੱਕ ਦਸਿਆ ਚਾਰੇ ਪਾਸੋਂ ਖੜੀ ਹੋਈ ਸੁਰਤੀ ਲਿਆ ਕੇ ਟਿਕਾ ਕੇ ਆਖਰੀ ਭਗਤੀ ਵਿੱਚ ਇੱਕ ਦਾ ਦਰਸ਼ਨ ਕਰਾਇਆ ਇੱਕ ਸੇਵਕ ਇੱਕ ਦ੍ਰਿਸ਼ਟਾ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੱਚ ਸਮਾਇਆ ਜਾ ਸਮਾ ਗਿਆ ਸੱਚ ਦੇ ਵਿੱਚ ਇੱਕੋ ਹੀ ਹੋ ਗਿਆ ਹਾਂਜੀ ਜੇ ਨਾਨਕ ਸੱਚ ਦੇ ਵਿੱਚ ਸਮਾ ਗਿਆ ਤੇ ਸੱਚ ਤਾਂ ਹੁੰਦਾ ਇੱਕ ਸੱਚ ਦੋ ਹੁੰਦਾ ਹੀ ਨਹੀਂ ਸਚਿਆਰਾ ਹੋ ਗਿਆ ਵਾਣ ਸੱਚ ਵਿੱਚ ਸਮਾ ਗਿਆ ਇੱਕੋ ਹੀ ਹੋ ਗਏ ਠੀਕ ਹੈ ਜੀ